ਸਲੋਕ ਮਹਲਾ ਤੀਜਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਤਾਰ ਕਬਰ ਤੋਂ ਪਹਿਲੇ ਦਾ ਮਤਲਬ ਉਹ ਬੇੜਾ ਜਿਹੜਾ ਮਰਦਾ ਜੀ ਕਦੇ ਜਿਉਂਦਾ ਤਿਉਂ ਰਹਿੰਦਾ ਇਹ ਜਿਹੜਾ ਅੰਮ੍ਰਿਤ ਵੇਲਾ ਇਹ ਕਹਿੰਦੇ ਨੇ ਉਹਦਾ ਰੋਜ ਮਰ ਜਾਂਦਾ ਫਿਰ ਘੰਟੇ ਦੋ ਘੰਟੇ ਦਾ ਅਮਰਤ ਮੇਲਾ ਫਿਰ ਨਾਲੇ ਕਦੇ ਕਿਤੇ ਅਮਰਤ ਮੇਲਾ ਹੁੰਦਾ ਕਿਤੇ ਕਦੇ ਹੁੰਦਾ ਕਿਤੇ ਕਦੇ ਹੁੰਦਾ ਇੱਕ ਵੇਲਾ ਹੁੰਦਾ ਹੀ ਨਹੀਂ ਉਹ ਅਸਲ ਦੇ ਵਿੱਚ ਕੋਈ ਯਾਰ ਰੋਜੇ ਕੋ ਹੁੰਦਾ ਸੀ ਰੋਜੇ ਕੋ ਹੁੰਦਾ ਸੀ ਰੋਜੇ ਲਾਉਂਦਾ ਸੀ ਉਧਰ ਜਦੋਂ ਦਰਗਾਹ ਦੇ ਵਿੱਚ ਦੀ ਦੇਖਿਆ ਵੀ ਹੌਬ ਵੀਰਾ ਵਾਕਈ ਨਾ ਪੁੰਦਦਾ ਇਹਨੇ ਮਾਇਆ ਬਿਲਕੁਲ त्यागी ਲਈ ਛੱਡਤੀ ਤਾਂ ਦਰ ਸੁਣੀ ਪਤਾ ਫਿਰ ਪਕਾ ਸੁਣੀ ਜੇ ਪੁਕਾਰ ਸੁਣੀ ਦੇਣ ਵਾਸਤੇ ਕੁਛ ਉਹ ਹੋਰ ਸੁਣੀਆਂ ਨਾ ਦੇਣ ਵਾਸਤੇ ਸੁਣੀ ਉਹ ਹੋਰ ਸੁਣੀਆਂ ਸੁਣੀ ਗਈ ਪੁਕਾਰ ਆਪਾਂ ਕਹਿੰਦੇ ਮੇਰੀ ਗੱਲ ਸੁਣੀ ਗਈ ਮੇਰੇ ਨਾਮ ਦਰਦੀ ਜੋ ਪੇਸ਼ ਆਏ ਤਬੀਆ ਅਮਰਤ ਬੇਲੇ ਬੋਲੇ ਉਹ ਜਦ ਟਾਈਮ ਆਇਆ ਅਮਰਤ ਪਰਚੰਦਾ ਤਬੀਆ ਬੋਲਿਆ ਪੁਕਾਰ ਸੁਣੀ ਗਈ ਫਿਰ ਕੀ ਹੋਇਆ ਫਿਰ ਉਹਨੂੰ ਫਰਮਾਨ ਹੋਆ ਅਮਰਤੋ ਕਿਰਪਾਤਾਰ ਕੋਈ ਮੇਹਡਾ ਸੀ ਤਾ ਤੇ ਵਿੱਚ ਸੁਰਨਾਕ ਨੂੰ ਵੇਖਿਆ ਫਤਿਹ ਆਂਕਦਾ ਸੁਰਿਆ ਫਿਰਦਾ ਅਮਰਤਪੁਰ ਆ ਗਿਆ ਉਹਨੂੰ ਕਿਹਾ ਵੀ ਜਾ ਨਾ ਮਿਲ ਕੋ ਉਹ ਨਾ ਉੱਠਿਆ ਉਹਦੇ ਅੰਦਰ ਵੀ ਆ ਨਾਨਕ ਮਿਲ ਚਲੀਏ ਫੇਲ ਮਲਾਤ ਉਧਰ ਤਾਂ ਬੋਲਦਾ ਉਹ ਬਬੀਆ ਮੈਨੂੰ ਅਮਰਤ ਮਲੇ ਨਾਂ ਕੋ ਬਰਤ ਹੈਗਾ ਉਹ ਕਾਲ ਸੁਣੀ ਗਈ ਫਰਨਾਨਕ ਨੇ ਬਰਨਕਾ ਕਰਤੀ ਅਮਰ ਦੀ ਬਸ ਹੋ ਗਿਆ ਜਦੋਂ ਪਰ ਤੁਸਰ ਪਰਪਾਤਾਰ ਕਿਰਪਾ ਧਾਰ ਵਰਸਗੀ ਬਬੀਆ ਆਨੰਦ ਹੋ ਗਿਆ। ਕੋ ਖੁੱਤਰ ਗਈ ਥਾਰੀ। ਕਹਿੰਦਾ ਹੋੜੇ ਜਾਣਾ, ਹੁੜ ਪੂਰਤੀ ਦੇ ਦਰਸ਼ਨ ਕਰਨੀ ਜਾਂ ਹੋ ਗਿਆ ਇੱਥੇ ਕਰ ਚ ਦੇ। ਚਿੱਤ ਨੇ ਜੀ ਇਹ। ਸਹੀ ਬਬੀਆ ਦਾ ਚੇਤਰਮਾਨ ਇਕੱਠਾ ਹੋਏ ਹੈ ਤੁਨੂੰ ਹੈ। ਦੋ ਪਾਜ਼ਾਰ ਤੋਂ ਮਿਲ ਕੇ ਬਾਅਦ ਬਬੀ ਹੈ। ਠੀਕ ਹੈ ਪਰ ਜੇ ਇਹ ਨਾ ਮੰਨ ਚ ਤੇ ਕਹੋ ਫਿਰ ਇਹਨੂੰ ਬਬੀਹਾ ਤੋਂ ਪਸ਼ੂ ਹੈ ਇਹ ਵੀ ਕਿਹਾ ਹੋਇਆ ਪਸ਼ੂ ਆਇਆ ਹਾਂ ਜਿਹਨੇ ਸੱਚ ਰੱਖਿਆ ਉਰਤਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਹਾਂ ਤਨਕੇ ਬਲਹਾਰਣੇ ਜੀ ਕਹਿੰਦੇ ਨੇ ਦੇ ਬਲਹਾਰੀ ਜਾਂਦੇ ਪਰਵਾਹ ਜਾਂਦੇ ਜਿਹਨੇ ਸੱਚ ਰੱਖਿਆ ਉਰਤਾਰ ਜਿਹਦੇ ਦਿਲ ਵਿੱਚ ਸੱਚੇ ਰੱਖਿਆ ਹੋਇਆ ਹੈ ਕਰਕੇ ਭਾਇਆ ਦੀ ਕੋਈ ਭੁੱਖ ਨਹੀਂ ਪਰ ਬਾਹ ਦਾ ਸਾਥੀ ਇਹਨਾਂ ਨੇ ਬਦਲਿਆ ਨਬ ਲਿਆ ਸੁਧ ਜਲੇ ਆ ਔਰ ਬਨ ਲਿਆ ਬਸ ਆਲੇ ਆ ਉਹਨਾਂ ਨੇ ਕੁਰਬਾਨ ਹੋ ਗਏ ਨਾਮ ਨੇ ਸਭ ਹਰਿਆਵਲੀ ਗੁਰ ਸ਼ਬਦ ਵਿਚਾਰ ਆ ਜਿਹੜਾ ਨਾਮ ਹੈ ਕੁਰਬਾਨੀ ਦਾ ਇਹਦੇ ਨਾਲ ਸਾਰੇ ਹਿਰਦੇ ਹਰੇ ਭਰੇ ਹੋ ਜਾਂਦੇ ਨੇ ਹਰੇ ਭਰੀ ਰੂਹ ਹੋ ਜਾਂਦੀ ਹੈ ਕੁਰਕੇ ਸ਼ਬਦ ਵਿਚਾਰ ਆ ਜਿਹੜਾ ਗੁਰਬਾਣੀ ਨਹੀਂ ਵਿਚਾਰਦਾ ਗੁਰਬਾਣੀ ਦੇ ਵਿੱਚ ਤਾਂ ਜਿਹੜਾ ਸੁਭਰਿਆ ਹੋਇਆ ਇਹਦੇ ਨਾਲ ਜਿਹਨੂੰ ਸਮਝ ਕੇ ਬਦਲਣ ਨਾਲ ਫਿਰ ਦੇ ਟਿਕਾਉਣ ਨਾਲ ਤਾਂ ਜਿਹੜੀ ਹੈ ਆਤਮਾ ਹਰੀ ਹੋ ਜਾਂਦੀ ਸ਼ਬਦ ਵਿਚਾਰ ਤਈ ਰਹਿੰਦੀ ਹੈ ਸ਼ਬਦ ਵਿਚਾਰ ਗੁਰਬਾਣੀ ਦੇ ਵਿਚਾਰ ਵਿੱਚ ਜੁੜਿਆ ਹੁੰਦਾ ਹਾਂਜੀ ਠੀਕ ਹੈ ਜੀ ਇੱਥੇ ਵੀ ਵਿਚਾਰ ਪਰੇ ਜ਼ੋਰ ਪਾਇਆ ਵੀ ਵਿਚਾਰ ਹੀ ਗੁਰਮਤ ਹੈ ਜੀ। ਵਿਚਾਰ ਦੇ ਵਿੱਚੇ ਚੀਜ਼ ਆ ਵਿਚਾਰ ਬਿਨਾ ਕੱਖ ਵਰੀ ਮਿਲਣਾ। ਆ। ਠੀਕ ਹੈ ਜੀ ਤੇ ਵਿਚਾਰ ਅੱਜ ਕੱਲ ਗੁਰਦੁਆਰਿਆਂ 'ਚ ਤਾਂ ਬੰਦੇ ਹੋਈ ਹੋਈ ਹੈ ਸਿਰਫ ਸ਼ਬਦ ਕੀਰਤਨ ਤੇ ਅਖੰਡ ਪਾਠ ਇਹੀ ਜ਼ਿਆਦਾ ਚੱਲਦੇ ਆ। ਕਿਤੇ ਨਹੀਂ ਵਿਚਾਰ ਹੈਗੀ ਹੁਣ ਹੋ ਸ਼ੁਰੂ ਕੋਈ। ਠੀਕ ਹੈ ਜਿੱਥੇ ਹੈ ਉਹ ਆਪਣੀ ਆਪਣੀ ਜਥੇਬੰਦੀ ਦੀ ਵਿਚਾਰ ਹੈਗੀ ਹੈ ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਲੱਭਣ ਵਾਲੀ ਵਿਚਾਰ ਨਹੀਂ ਜਥੇਬੰਦੀ ਦੀ ਵਿਚਾਰ ਬਣੀ ਹੈ ਉਹ ਬੋਲ ਕਤੇ ਕਰਨ ਦੀ ਵਿਚਾਰ ਹੈ ਜਾਂ ਫਿਰ ਮਾਇਆ ਡੇਰੇ ਬਣੂਰ ਦੀ ਵਿਚਾਰ ਹੈ ਜਾਂ ਗੱਡੀਆਂ ਬੜੀਆਂ ਆਪਣੀਆਂ ਆਪਣੀ ਇੱਜ਼ਤ ਕਦੇ ਆਦਮੀ ਜੋੜ ਹੈ ਨਾਲ ਛੜੇ بڑے ਬਣਾਉਣ ਦੀ ਵਿਚਾਰ ਹਾਂਜੀ ਮਹੱਲਾ ਤੀਜਾ ਬਾ ਇਵ ਤੇਰੀ ਟਿਕਾਣਾ ਉਤਰੈ ਜੇ ਸੋਹ ਕਰੇ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਕਿਉਂ ਤੇਰੀ ਨੀ ਉੱਤਰਦੀ ਜੇ ਸੋਹ ਕਰੇ ਪੁਕਾਰ ਭਾਵੇਂ ਸੈਂਕੜੇ ਪੁਕਾਰਾਂ ਕਰ ਕਿਉਂ ਉਹ ਪੁਕਾਰ ਜੀਣਾ ਕਰਦਾ ਅੰਦਰੋਂ ਉਤੋ ਉਤੋ ਹੀ ਕਰਦਾ ਅੰਦਰ ਕੋਈ ਛੋੜ ਹੈ ਬਾਹਰੋਂ ਝੋਟੇ ਕੋਈ ਛੋੜ ਹੈ ਜਦ ਮਨ ਹੋਰ ਬੁਖ ਹੋਰ ਤੇ ਕਾੜੇ ਕਟਿਆਂ ਉੱਤੋਂ ਅੰਦਰ ਮਰਦਾ ਨਾ ਨਾ ਕੋੜ ਦਾੜਾ ਹੋ ਜਾੜ ਰੋੜ ਕੇ ਬਗਦੇ ਤੋ ਬੁੱਕਦਾਨੀ ਅੰਦਰੋਂ ਸਤਿਰੁ ਭਾਇਆ ਮੰਗਦਾ ਸਤਿਰ ਤੋਂ ਖਮਾਇਆ ਦੀ ਹੈ ਨਾਮ ਦੀ ਤਾਂ ਭੁੱਖ ਹੀ ਨਹੀਂ ਹੈ ਤੇ ਪਿਆਸ ਦੀ ਤਾਂ ਸੰਦੀ ਵਾਰ ਬੁਕਾਰ ਕਰਦਾ ਰਹੇ ਕਦੇ ਹੀ ਪਾਈ ਹੈ ਨਤਰੀ ਉਪਜੇ ਪਿਆਰ ਕਿਰਪਾ ਹੋਊਗੀ ਮਿਹਰ ਹੋਊਗੀ ਪਰਮੇਸ਼ਰ ਦੀ ਤਾਂ ਸਤਗੁਰ ਦਬਲਾਫ ਹੋਊਗਾ ਤਾਂ ਖਤਿਰਿਆ ਲਿਆਨ ਮਿਲੂਗਾ ਜਦ ਨਹੀਂ ਉਹ ਜਿਆ ਪਿਆਰ ਕਿਰਪਾ ਹੋਊਗੀ ਤਾਂ ਸੱਚ ਨਾਲ ਪਿਆਰ ਪਾਊਗਾ ਵਰਤ ਪਿਆਰ ਸੱਚ ਨਾਲ ਪਹਿਰ ਹੀ ਸਕਦਾ ਹਰ ਕਿਰਪਾ حاصل ਉਹ ਕਿਵੇਂ ਕਰ ਲਈਏ ਤਾਂ ਇਹ ਤੂੰ ਦੇਖ ਕਿਰਪਾ ਕਦੋਂ ਹੋਊਗੀ ਕਿਰਪਾ ਚੱਲੇਗਾ ਸਰਕਾਰ ਵੀ ਕਿਰਪਾ ਉਹਦੇ ਤੇ ਸਰਕਾਰ ਦੇ ਹੁਕਮ ਦੇ ਚੱਲਦਾ ਸਰਕਾਰ ਉਹਦੇ ਨਾਲੇ ਖੁਸ਼ ਹੈ ਜਿਹੜਾ ਸਰਕਾਰ ਦੇ ਤੁਹਾਨੂੰ ਦੋ ਦੂ ਹਾਂਜੀ ਠੀਕ ਹੈ ਜੀ ਇਹ ਫਿਰ ਉਹ ਜਿਵੇਂ ਕੀਕ ਪ੍ਰੀਤ ਜੀ ਦਾ ਸ਼ਲੋਕ ਹੈ ਕਿ ਕਬਹੀ ਚੱਲਣਾ ਆਇਆ ਪੰਜੇ ਵਖਤ ਮਸੀਤ ਬਿਨਾ ਜੁੜੇ ਜਿਹੜੀ ਪੁਕਾਰ ਹੈ ਕੋਈ ਸੁਣਦਾ ਨਹੀਂ ਕੋਈ ਉਸ ਪੁਕਾਰ ਤੇ ਭਰੋਸਾ ਨਹੀਂ ਹੈ ਠੀਕ ਹੈ ਭਰੋਸੇ ਤੋਂ ਬਿਨਾ ਨਦਰ ਨਹੀਂ ਹੈ ਹਾਂਜੀ ਭਰੋਸਾ ਜੀਏ ਉਹਨਾਂ ਕੋਲ ਜਦਿਆ ਕੋਈ ਹਥਿਆਰ ਜਲਾਉਣ ਗੌਰਮਿੰਟ ਨਾਲ ਸੰਸਦ ਨਹੀਂ ਨਦੀ ਪਹਿਲਾਂ ਇਹਦਾ ਕੀ ਹੈ ਇਹਦਾ ਡਾਕੇਬੰਦ ਲੱਗ ਜੂਗਾ ਉਹ ਹੈਗਾ ਜੀ ਸ਼ਲੋਕ ਅਸਲ ਚੱਲਣਾ ਆਇਆ ਬੜੀ ਨਿਵਾਜ਼ ਹੋਈ ਬਾਹਰ ਚੱਲ ਗਏ ਬਾਹਰ ਤਾਂ ਤੁਸੀਂ ਹੈਗੀ ਜੀ ਉਹ ਮਹਿਰ ਮਸਜਿਦ ਉੱਥੇ ਵੀ ਤਾਂ ਮਹਿਰ ਹੈ ਤੁਸੀਂ ਤਾਂ ਠੀਕ ਹੈ ਮਹਿਰ ਦੇ ਵਿੱਚ ਕੀ ਆ ਜਾਂਦਾ ਚੱਲਿਆ ਗਿਆ ਸੀ ਮਹਿਰ ਹੋਈ ਦੀ ਤੁਸੀਂ ਕਿੱਥੇ ਉਹ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਹੋ ਫਿਰ ਉਹ ਹੋਰ ਹੈ ਕੋਈ ਜ਼ੇਦ ਨਹੀਂ ਬੰਦੀ ਕੁਰਬਾਨੀ ਉਹਨੂੰ ਮਸਜਿਦ ਲਿਖਿਆ ਨਾਲੇ ਮਸਜਿਦ ਹੋ ਰਹੀ ਹੈ ਠੀਕ ਹੈ ਇਸ ਤਰ੍ਹਾਂ ਦੀ ਪੁਕਾਰ ਦਾ ਕੋਈ ਅਸਰ ਨਹੀਂ ਹੋਏਗਾ ਤੈ ਹਜ਼ਾਰਾਂ ਵਾਰੀ ਪੁਕਾਰ ਕਰੇ ਠੀਕ ਹੈ ਜੀ ਨਾਨਕ ਸਾਹਿਬ ਮਨ ਵਸੈ ਜਾਏ ਵਿਕਾਰ ਕਹਾਂ ਬਚਵੇ ਜੇ ਤੇ ਆਪਣਾ ਮੂਲ ਨੂੰ ਸਹਿ ਮੰਨ ਲਵੇ ਕੋਣ ਇਹ ਦੂਸਾਲ ਤੇ ਵੀ ਹੁ ਛੋਟਾਂ ਤੇ ਵੜਿਆ ਹੋਏ ਦਾਸ ਆਣੇ ਸਾਹਿਬ ਹੈ ਪਿੱਛੋਂ ਜਾਣ ਵਿਕਾਰ ਤੇ ਆ ਨੇ ਤੇ ਕਿਉਂ ਚਲੇ ਜਾਣ ਕਿ ਤੇਰੇ ਕੋਈ ਵੀ ਰਣ ਜਿੰਨੇ ਓਗਣੇ ਵਿਕਾਰ ਹੋਵੇ ਬਸ ਓਗਣਾਂ ਆ ਤੇ ਛੱਡਦੇ ਆ ਆਪੇ ਨਿੱਤਰ ਜਾਂਦੇ ਹੈਂ ਇੱਕ ਜੈਨੀ ਉੱਜੜ ਪਾਏ ਧਰੋਂ ਖਵਾਇਆ ਤਿੰਨ ਮੁਖ ਨਾਹੀਂ ਨਾਮ ਨਾ ਤੀਰਥ ਹੀ ਨਾ ਆਇਆ ਇੱਕ ਜੈਨੀ ਦੇ ਜੇ ਕੋ ਜੈਨੀ ਦੇ ਸਦਾ ਇਹਦਾ ਕੀਤਾ ਹੋਇਆ ਜੈਨੀ ਜੈਨੀ ਸਾਡੇ ਦਿਨੇ ਕੱਢਨੇ ਜਾਂ ਸੀ ਜੈਨੀ ਨੇ ਕੀਤਾ ਸੀ ਕਿ ਸਾਡੇ ਕੋਲ ਕੋਈ ਕਮੀ ਹੈ ਉਹ ਜਿਹੇ ਸਿਕਲ ਸੀ ਨਹੀਂ ਹੈਗੇ ਤੇ ਜੈਨੀ ਮੁਖਰ ਹੋ ਜਾਣਗੇ ਫਿਰ ਕੀ ਕਹੋਗੇ ਤੁਸੀਂ ਜੈਨੀ ਤੁਸੀਂ ਕਿਉਂ ਕਹਿਣਾ ਸਾਨੂੰ ਇੱਕ ਜੈਨੀ ਉੱਜੜ ਪਾਏ ਉੱਜੜ ਪਾਏ ਫਿਰ ਰਾਤ ਨੂੰ ਲਗੇ ਪਤਾ ਨਹੀਂ ਕੀ ਕਰਦੇ ਤਰੋਂ ਖਾਇਆ ਅੰਦਰ ਉਹਨਾਂ ਦੇ ਅਗਰੋਈ ਹਸਪਤਾਲ ਹੀ ਦੀ ਹੈ ਅੰਦਰ ਉਹ ਹੋਰ ਬੁੱਢੀ ਬੈਠੇ ਜੀ ਕੁਛ ਹੋ ਗਏ ਅੰਦਰ ਦੇ ਵਿੱਚੇ ਖੋ ਗਏ ਉਹ ਫਿਰ ਮੁਕਰਾਈ ਲੋਬ ਨਾ تیرਸ ਆਇਆ ਨਾ ਕਿ ਉਹਨਾਂ ਦੇ ਮੂਹ ਦੇ ਵਿੱਚ ਗਿਆਨ ਦੀ ਕੋਈ ਗੱਲ ਨਾ تیرਸ ਇਸ਼ਨਾਨ ਦੀ ਕੋਈ ਗੱਲ ਹੈ ਉਹਨਾਂ 'ਚ ਵੀ ਚਲੋ ਸ਼ੁੱਧ ਕਰਨਾ ਮਤਲਬ تیر ਦਾ ਮਸਲਾ ਦਾ ਬਸ ਨੂੰ ਸ਼ੁੱਧ ਕਰਨ ਵਾਲੀ ਕੋਈ ਗੱਲ ਨਹੀਂ ਹਾਂ ਇਹ ਵਿੱਚ ਆਵਾਲੇ ਦੀ ਗੱਲ ਨਹੀਂ ਹੈ ਆਵਾਲੇ ਦੀ ਤੇ ਤਾਂ ਇੱਕ ਕੁਆਲਟੀ ਦੇ ਹੱਦਿਆਂ ਤੋਂ ਪੌਟੜੀਅਸ ਹੋਰ ਉੱਤੇ ਤਾਂ ਹੋਰ ਚੱਲ ਜਾਂਦੇ ਨੇ ਸਭ ਨੂੰ ਬੰਨੂ ਸ਼ੁੱਧ ਕਰਨ ਦੀ ਗੱਲ ਹੈ ਹਾਂਜੀ ਮੱਥੀ ਸਿਰ ਖੁਆਏ ਨਾ ਭੱਦ ਕਰਾਇਆ ਉਚੀਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਅੱਬੀ ਸਿਰ ਖੁਆਏ ਨਰਾਇਣ ਨਾਰੋ ਲਕੂ ਦਾ ਖੁਆਇ ਇਹੋ ਨੇ ਨਾਰੋ ਨਾ ਦੀ ਸਿਰ ਖੁਆਇਨ ਪੱਧ ਕਰਾਇਆ ਖੁਆਇ ਪੱਧ ਕਰਾਇਆ ਉਹ ਆਪਣੀ ਬੇਇੱਜ਼ਤੀ ਕਰਾ ਲਈ ਪੱਟ ਪਟਾ ਲਈ ਇਹਨਾਂ ਕੀ ਮੈਣਾ ਸੀ ਇਹਦੇ ਚ ਉਹ ਬੇਇੱਜ਼ਤੀ ਕਰਾ ਲਈ ਲੋਕ ਗੁਜਾ ਕਰ ਨੇ ਪੱਟ ਪਟਾਇਆ ਕੁਚੀਲ ਰਹੇ ਦਿਨ ਰਾਤ ਤਾ ਦਿਨ ਰਾਤ ਕੁਚੀਲ ਰਹਿੰਦੇ ਨੇ ਮੰਦੇ ਰਹਿੰਦੇ ਨੇ ਜੰਗਲ ਪਾਣੀ ਜਾਂਦੇ ਨੇ ਅਸਲੀ ਧੁੰਦ ਉਹ ਸ਼ਬਦ ਨਾ ਪਾਇਆ ਜਿਹੜਾ ਉਪਦੇਸ਼ ਗੁਰਬਾਣੀ ਦਾ ਉਹ ਨਹੀਂ ਚੰਗਾ ਲੱਗਿਆ ਉਹ ਅਸੀਂ ਮਿਲੇ ਸੀ ਕਹਿੰਦੇ ਉਹਨਾਂ ਨੂੰ ਦੱਸਿਆ ਸੀ ਉਹਨਾਂ ਤੁਹਾਡੀ ਗੱਲ ਆ ਨਹੀਂ ਚੰਗਾ ਲੱਗਿਆ ਮਿਲੇ ਹੁਣੇ ਨੇ ਤਾਂ ਉਹ ਗੱਲ ਨਹੀਂ ਹੈ ਇਤਿਹਾਸਿਕ ਗੱਲ ਹੈ ਨਾ ਪਾਇਆ ਦਾ ਮਤਲਬ ਉਹ ਹੁਣ ਉਹ ਕਿੱਥੋਂ ਮਿਲੇ ਅਸੀਂ ਸ਼ਬਦ ਦਿੱਤਾ ਹੀ ਹੋ ਆਪੇ ਜage ਗੱਲ ਵਰਤ ਕੀਤੀ ਨੂੰ ਇਹ ਕਿ ਪੱਧ ਕਰਾਇਆ ਦਾ ਮਤਲਬ ਇਹ ਤਾਂ ਨਹੀਂ ਵੀ ਉਸਰੇ ਨਾਲ ਮੁੰਨਣ ਦੀ ਬਜਾਏ ਹੱਥਾਂ ਨਾਲ ਇੱਕ ਪੱਤ ਪਟ ਜਾਣੀ ਸਾਰੀ ਦੁਨੀਆ ਜਿਹਨੂੰ ਚੰਗਾ ਠੀਕ ਹੈ ਜੀ ਕਰਾ ਲਈ ਤੇ ਇਕ ਤਾਂ ਇਹ ਪੰਕਤੀ ਦਾ ਪਦ ਛੇੜ ਜਿਹੜਾ ਲਿਖਿਆ ਛਾਪੇ ਵਾਲੀ ਬੀੜ ਚ ਸਹੀ ਨਹੀਂ ਹੈ ਜੀ ਹੱਥੀ ਸਿਰ ਕੁਆਏ ਨਾ ਪੱਧ ਕਰਾਇਆ ਹੋਣਾ ਚਾਹੀਦਾ ਹੱਥੀ ਸਿਰ ਕੁਆਏ ਪੱਧ ਕਰਾਇਆ ਹਾਂਜੀ ਬਾਹਰ ਪੱਧ ਕਰਾਇਆ ਕੀ ਹੋਵੇ ਤਰ ਫਿਰ ਪੱਟਕਾ ਦੇ ਨਾ ਕਰਾਇਆ ਹਾਂਜੀ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਝੂਠੇ ਵੇ ਜਾਤ ਝੂਠਾ ਖਾਇਆ ਨਾ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਨਾ ਕੋਈ ਜਾਤ ਰਹੀ ਕੋਈ ਨਾ ਪਤ ਰਹੀ ਕੋਈ ਨਾ ਕੋਈ ਕਰਮ ਰਹਾ ਕਮਨ ਕੋਈ ਨਾ ਕੁਝ ਵੀ ਉਹ ਜਾਤ ਮਨੁੱਖਾ ਜਾਤ ਵੀ ਬਵਾਲੀਆ ਨੇ ਜਾਤ ਦਾ ਮਤਲਬ ਉਹ ਜਾਤ-ਬਾਤ ਨਹੀਂ ਹੁੰਦੀ ਆ ਬਰੁੱਖਾ ਜਿਹੜਾ ਜਨਮ ਹੈ ਵੀ ਜਾਤ ਹੈ ਨਾ ਉਹਨਾਂ ਇਹ ਜਾਤ ਨੂੰ ਆਪਾਂ ਜਾਤੀ ਲਾਭ ਨੂੰ ਗਿਆਨ ਦੇ ਸੰਦਰਭ ਚ ਲੈ ਲੀਏ ਜੋ ਜਾਣੇ ਇਹ ਵੀ ਠੀਕ ਹੈ ਨਾ ਤਾਂ ਨਾਲ ਗਿਆਨ ਜਾਣਕਾਰੀ ਹੈ ਕੋਈ ਨਾ ਉਹਨਾਂ ਦੀ ਕੋਈ ਇੱਜ਼ਤ ਹੈ ਦੁਨੀਆ ਦੇ ਵਿੱਚ ਇੱਥੇ ਪਤਾ ਕਿ ਇੱਜ਼ਤ ਹੈ ਉਹ ਜਿਹੜਾ ਭਾਦਾ ਦਾ ਲੱਭਦੇ ਅੱਠਾਗੇ ਤੋਂ ਦੇ ਵਿੱਚ ਨਾ ਕਰਮ ਨਾ ਉਹਨਾਂ ਦੇ ਉੱਤੇ ਕੋਈ ਦਰਗਾਹ ਜੋ ਕਰਤਾ ਹੋਈ ਹੈ ਕੈਜਾ ਕੰਮ ਕਰਨ ਕੋਈ ਤਾਂ ਕਿਰਪਾ ਹੋਵੇ ਕੱਬ ਤਾ ਉਹ ਚਾਹੀਦਾ ਕਰਦੇ ਸੀ ਜਨਮ ਗਵਾਇਆ ਆ ਮੈਂ ਜਨਮ ਗਵਾ ਲਿਆ ਗਵਾਇਆ ਕਰਕੇ ਜਨਮ ਪਦਾਰਥ ਮਿਲਣ ਦਾ ਜਿਹੜਾ ਸਮਾਂ ਉਹ ਗਵਾ ਲਿਆ ਜੀ ਹਾਂ ਠੀਕ ਹੈ ਜੀ ਮਨ ਝੂਠੇ ਵੇ ਜਾਤ ਝੂਠਾ ਖਾਇਆ ਬਸ ਝੂਠਾ ਉਹਨਾਂ ਦਾ ਸਰੀਰ ਦੀ ਸੱਚ ਹੁੰਦੀ ਹੋਈ ਨਹੀਂ ਜਿਹਨੂੰ ਅਸੀਂ ਬੁਲਿਆ ਹੋਇਆ ਹੈ ਬਸ ਆਸਾ ਕਾ ਬੀ ਹੋਇਆ ਤੰਗ ਬਣ ਸਾਚਾ ਮੁਕਤਾ ਤੇ ਕੋ ਬਣ ਕਰਕੇ ਸੱਚਾ ਆਰਮਣ ਕਰਕੇ ਝੂਠੀ ਦੀ ਗੱਲ ਜੇ ਮਨ ਦੇ ਵਿੱਚ ਲੋਭ ਹੈ ਤਾਂ ਝੂਠਾ ਆਉਟਰ ਨੇ ਤਾਂ ਝੂਠਾ ਪਰ ਝੂਠੇ ਦੇ ਉਹ ਬੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਆਰ ਬੇਮਾਨ ਦਾ ਝੂਠਾ ਬੇਜਾਤ ਦਾ ਮਸਲਾ ਹੈ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਸਾਡਾ ਬੰਤ ਝੂਠਾ ਹੈ ਗਿਆਨ ਹੈ ਬੰਤ ਝੂਠਾ ਹੈ ਖਾਇਆ ਖਾਣੇ ਕੀ ਨੇ ਜੋ ਖਾਣਦੇ ਨੇ ਜੋ ਗਿਆਨ ਹੈ ਉਹਨਾਂ ਦਾ ਝੂਠਾ ਹੀ ਖਾਧਾ ਹੋਇਆ ਹੋ ਕੇ ਚੱਲੋ। ਕੋਈਆਂ ਨੇ ਫਲਾਣੇ ਦਾ ਝੂਠਾ ਨਾ ਖਾਣ। ਝੂਠਾ ਖਾਣਾ ਉਹਦੇ ਸਿੱਖਿਆ ਨਾਲ ਨਹੀਂ। ਝੂਠਾ ਖਾਣਾ ਸਿੱਖਿਆ ਲਈ ਲੈਣੀ ਹੈ। ਜੋ ਗਲਤ ਸਿੱਖਿਆ ਉਹ ਝੂਠਾ ਖਾਣਾ ਕਹਿੰਦੇ ਨੇ। ਉਹਨੂੰ ਕੂੜ ਵੀ ਕਿਹਾ ਜੀ। ਹਾਂ ਹਾਂ। ਕੂੜ ਦੇ ਚ ਕਿਹਾ ਖਾਣਾ ਹੀ ਜਿਹੜਾ ਸੱਚ ਨਹੀਂ ਸਿੱਖਿਆ ਇਹ ਫਰਤ ਹੈ। ਸੱਚੀ ਦੀ ਸਿੱਖਿਆ ਜੋ ਫਰਤ ਖਾਣਾ। ਸਾਚੀ ਖਾਣਾ ਸੱਚ ਪੈਣਾ। ਬਿਨ ਸ਼ਬਦੈ ਆਚਾਰ ਨਾ ਕਿਨਹੀ ਪਾਇਆ ਗੁਰਮੁਖੀ ਓੰਕਾਰ ਸੱਚ ਸਮਾਇਆ ਉਪਦੇਸ਼ ਦੇ ਬਿਨਾ ਕਿਸੇ ਨੂੰ ਆਚਾਰ ਦਾ ਪਤਾ ਹੀ ਨਹੀਂ ਲੱਗਿਆ ਆਚਾਰਨ ਆਚਾਰਨ ਨਹੀਂ ਜੰਗਾ ਹੋ ਸਕਦਾ ਉਪਦੇਸ਼ ਬਿਨਾ ਆਚਾਰਨ ਕੀ ਕਰਨਾ ਕੀ ਨਹੀਂ ਕਰਨਾ ਸੰਸਾਰ ਚ ਆ ਇਹ ਆਚਾਰ ਹੈ ਸਾਡਾ ਆਚਾਰ ਵਿਚਾਰ ਤੋਂ ਕੰਨਾ ਨਹੀਂ ਸੈਂ ਸ਼ਬਦੀ ਵਿਚਾਰ ਤੋਂ ਕੰਨਾ ਆਚਾਰ ਨਹੀਂ ਜਿਸ ਨੇ ਨਹੀਂ ਪਾਇਆ ਆਚਾਰ ਸੁਪਦੇਸ਼ ਦੇ ਬਿਨੂੰ ਗੁਰਮੁਖੀ ਓਮਕਾਰ ਸੱਚ ਸੁਭਾਇਆ ਅਰੇ ਉਹਕਾਰ ਕੌਣਾ ਜਿਹੜਾ ਗੁਰਮੁਖਾ ਉਹ ਓਮਕਾਰ ਸੱਚ ਸੁਭਾਇਆ ਓਮਕਾਰ ਤੇ ਉਹ ਸਿਆਰੀ ਹੈ ਜੀ ਵੀ ਜਿਹੜਾ ਗੁਰਮੁਖਾ ਓਮਕਾਰ ਵਿੱਚ ਸੱਚ ਹੋ ਕੇ ਸਮਾ ਗਿਆ ਹੈ ਜੀ ਉਹਕਾਰ ਦੇ ਵਿੱਚੇ ਸਮਾ ਗਿਆ ਓਮਕਾਰ ਹੀ ਹੋ ਗਿਆ ਜਿਵੇਂ ਇੱਕ ਹੋ ਕੇ ਉੱਗਦਾ ਪਰ ਉਹ ਜੋਤਾ ਕਾਰ ਬਣ ਗਿਆ ਉਹਦਾ ਜਿਹੜਾ ਸ਼ਬਦ ਉਹ ਕਾਰ ਕਹਿਣਾ ਦੋ ਹੋਗੇ ਨਾ ਉਹ ਗਿਆ ਇੱਕ ਬੀਜ ਹੈ ਉਹ ਕਾਰ ਹੋ ਗਿਆ ਹੋਇਆ ਢੇੜ ਉਹ ਕਾਰ ਹੋ ਗਿਆ ਉਹ ਕਾਰ ਹੈ ਜਿਹੜਾ ਧਰਾਤਰੀ ਜੋਤ ਸਰੂਪ ਜਦੋਂ ਹੈ ਨਾ ਇਹਨੂੰ ਕਹਿੰਦੇ ਨੇ ਨਾਨਕ ਗੁਰ ਸਰ ਤੋਂ ਓਕਾਰ ਕੀ ਹੈ ਰੁਖ ਹੈ ਜਹਾਨ ਕੋ ਗੋਰ ਸੰਤੋਖ ਰੁਖ ਜਿਹੜਾ ਗੋਰਾਣਾ ਅੰਦਰ ਸਤਗੁਰ ਉਹ ਸੰਤੋਖ ਰੂਪੀ ਰੁਖ ਸੰਤੋਖੀ ਹੋ ਜਾਂਦਾ ਜਦ ਦੇ ਰੁਖ ਬਣ ਸਤੋਖੀ ਹੋ ਕੇ ਇੱਕ ਕੋ ਗੋਰ ਸੰਤੋਖ ਉਹਨੂੰ ਫੁੱਲ ਤੱਕ ਲੈ ਕੇ ਜਾਂਦਾ ਫਿਰ ਯਾਤਰਾ ਪੈਦਾ ਹੁੰਦਾ ਫਿਰ ਗਿਆਨ ਫੁੱਲ ਲੱਗਦਾ ਠੀਕ ਹੈ ਜੀ ਗੱਲ ਇਹ ਸਮਝਾਈ ਐ ਪੌੜੀ ਥਾਂ ਜੀ ਕਿ ਜਿਹੜੇ ਜੈਨੀ ਲੋਕ ਹੈ ਉਹਨਾਂ ਕੋਲ ਗਿਆਨ ਝੂਠਾ ਹੈ ਉਹ ਝੂਠੇ ਗਿਆਨ ਕਰਕੇ ਇੱਕ ਤਾਂ ਮਨ ਤਾਂ ਝੂਠਾ ਹੈ ਹੀ ਸਰੀਰ ਨੂੰ ਵੀ ਉਹ ਸਾਫ਼ ਨਹੀਂ ਰੱਖਦੇ ਹਾਂ ਜੀ ਆਹ ਸਰੀਰ ਤਾਂ ਹਰੇਕ ਚਾਹੇ ਕੋਈ ਧਰਮੀ ਹੋਵੇ ਧਰਮੀ ਹੋਵੇ ਸਰੀਰ ਨੂੰ ਤਾਂ ਸਾਫ਼ ਰੱਖਦਾ ਤੇ ਉਹ ਸਰੀਰ ਨੂੰ ਵੀ ਸਾਫ਼ ਰੱਖਦੇ ਸਾਡੀ ਦਾ ਪੱਤ ਪਟਾਇਆ ਲਿਖਿਆ ਹੋਇਆ ਸਾਡੀ ਦੁਨੀਆ ਜੇ ਤੋਏ ਤੋਏ ਕਰਾ ਲਈ ਉਹਨਾਂ ਨੇ ਠੀਕ ਹੈ ਜਿਹੜੇ ਕਸ ਦੇ ਗਾਂ ਨਹੀਂ ਰੱਖਦੇ ਉਹ ਵੀ ਨਹੀਂ ਹਰ ਚੰਗਾ ਸਮਝਦੇ ਉਹ ਰਜਨੀਸ਼ ਜਿਹੜਾ ਸੀ ਆਪ ਵੀ ਜੈਨੀਆਂ ਦੇ ਅਗੇਂਸਟ ਇਸੇ ਤਰ੍ਹਾਂ ਬੋਲਦਾ ਸੀ ਵੀ ਅਹਿੰਸਾ ਨੂੰ ਅਸੀਂ ਗਲਤ ਰੂਪ ਲੈ ਲਿਆ ਉਹਨੇ ਕਿਹਾ ਸੀ ਕਿ ਮਹਾਵੀਰ ਤਾਂ ਛਤਰੀਏ ਸੀਗਾ ਪਰ ਅੱਜ ਕੱਲ ਜਿੰਨੇ ਜੈਨੀਆਂ ਸਭ ਬਾਣੀਆਂ ਐ ਤੇ ਨਾਲੇ ਇਹਨਾਂ ਨੇ ਗਲਤ ਪ੍ਰਚਾਰ ਕੀਤਾ ਕਿ ਮਹਾਵੀਰ ਦਾ ਵਿਆਹ ਨਹੀਂ ਸੀ ਹੋਇਆ ਉਹ ਕਹਿੰਦਾ ਮਹਾਵੀਰ ਦਾ ਵਿਆਹ ਵੀ ਹੋਇਆ ਸੀ ਉਹਦੀ ਇਕ ਲੜਕੀ ਵੀ ਸੀ ਹੋ ਸਕਦਾ ਆਉ ਉਹ ਆਪ ਜੈਨੀ ਸੀ ਉਹਨੇ ਕਿਹਾ ਵੀ 14 24 ਜਿਹੜੇ ਤੀਰਥੰਕਰ ਸੀਗੇ ਜੈਨਾਂ ਦੇ ਜੈਨੀਆਂ ਦੇ ਸਾਰੇ क्षत्रियੇ ਸੀਗੇ ਬਿਲਕੁਲ ਠੀਕ ਪਰ ਅੱਜ ਤੁਹਾਨੂੰ ਨਾ ਤਾਂ ਕਿਸਾਨ ਮਿਲੇਗਾ ਕੋਈ ਜੈਨੀ ਕਿਉਂਕਿ ਉਹ ਜਿਹੜੀ ਚੀਜ਼ ਮਿੱਟੀ ਚ ਉਗਦੀ ਹੈ ਉਹਨੇ ਖਾਣੀ ਨਾ ਤੁਸੀਂ ਜਮਾਉਣੀ ਹੈ ਪਾਪ ਨਾ ਹੋ ਜਵੇ ਨਾ ਤਾਂ ਤੁਹਾਨੂੰ ਕਿਸਾਨ ਕੋਈ ਜੈਨ ਮਿਲੇਗਾ ਸਿਰਫ ਬਾਣਿਏ ਜੈਨ ਰਹਿ ਗਏ ਆ ਕਹਿੰਦਾ ਸੀ ਪਰ ਬਾਣਿਏ ਬਹੁਤ ਡਰਪੋਕ ਹੁੰਨੇ ਆ ਤਾਂ ਜੈਨ ਧਰਮ ਦਾ ਵਿਕਾਸ ਨਹੀਂ ਹੋ ਕਹਿੰਦਾ ਹੋ ਸਕਦਾ ਬਿਲਕੁਲ ਠੀਕ ਹੈ ਜੀ ਪਰ ਸਾਨੂੰ ਵੀ ਸਿੱਖ ਲੈਣੀ ਹੈ ਵੀ ਜੇ ਜੈਨੀਆਂ ਦੇ ਖਿਲਾਫ ਇਹ ਕੁਝ ਲਿਖਿਆ ਹੈ ਕਿ ਗੁਰਮੁਖ ਓੰਕਾਰ ਸੱਚ ਸਮਾਇਆ ਹੋਈ ਹੈ ਕਿ ਨਹੀਂ ਆ ਉਹ ਵੀ ਸਾਨੂੰ ਕਹਿ ਸਕਦੇ ਜੀ ਕਿ ਜੇ ਅਸੀਂ ਬੋਲਾਂਗੇ ਕੱਲ ਨੂੰ ਨੂੰ ਪਤਾ ਲੱਗ ਜੇ ਉਹ ਕਹਿੰਦੇ ਤੁਸੀਂ ਕੀ ਕਰਦੇ ਹੋ ਵੀ ਤੁਸੀਂ ਗੁਰਬਾਣੀ ਰਖਾ ਲਓ ਠੀਕੀ ਜਵਾਬ ਆਮਾ ਦੇ ਠੀਕ ਹੈ ਜੀ ਆਪਾਂ ਉਸ ਪੱਖੋਂ ਇਹ ਪੌੜੀ ਸਮਝਣੀ ਹੈ ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ